ਹਾਂਜੀ ਮੰਮੇ ਅਖਰ ਦਾ ਉਪਦੇਸ਼ ਵੀ ਚਾਰੇ ਬਾਣੀਆਂ ਚੋ ਹੈ ਜੀ ਹੋਈ ਸਭ ਤੋਂ ਭਗਤ ਕਬੀਰ ਜੀ ਵੱਲੋਂ ਹੈ ਜੀ ਮੰਮਾ ਮੂਲ ਗਯਾ ਮਨ ਮੰਨੈ ਮਰਮੀ ਹੋਏ ਸੋ ਮਨ ਕੋ ਜਾਣੈ ਬੰਤੂ ਆਪਣਾ ਮੂੜ ਪਛਾਣ ਜਦੋਂ ਇਹਨੇ ਆਪਣਾ ਮੂੜ ਪਛਾਣ ਲਿਆ ਇਹਦੀ ਪਕੜ ਕੇ ਆ ਗਿਆ ਮੂੜ ਗਿਆ ਮੂੜ ਮੰਮਾ ਮੂੜ ਗਿਆ ਬੰਨ ਬੋਗਿਆ ਬਾ ਨਆਨੂੰ ਜੱਗਰ ਨੇ ਜਿਆਦਾ ਬੰਦ ਗਿਆ ਬਾਹਰੋਂ ਚੱਲਣਾ ਨਹੀਂ ਬੁਦਦਾ ਮੁਰ ਮਰਮੀ ਹੋਏ ਸਾਮਨ ਕੋ ਜਾਣੇ ਜੇ ਕੋਈ ਖੋਜੀ ਹੋਵੇ ਉਹ ਮਾਨੂੰ ਜਾਣ ਲੰਦਾ ਹੈ ਸਾਦੀ ਤੇ ਮਾਨੂੰ ਜਾਣਿਆਂ ਦੀ ਜਾ ਸਕਦਾ ਮਨ ਜਾਣਿਆਂ ਜਾ ਸਕਦਾ ਪਰ ਕੋਈ ਖੋਜੀ ਹੋਵੇ ਤਾਂ ਸਹੀ ਕੋਈ ਮਰਮੀ ਹੋਵੇ ਤਾਂ ਮਾਨੂੰ ਜਾਣ ਸਕਦਾ ਮਰਮੀ ਹੋਏ ਤਾਂ ਮਨ ਕੋ ਜਾਣਦੇ अच्छा मूल गया तो की भावे की मम्मा अखर तो तो विदेश है मूल गया मन मन है तिरगुडी छड़ला बन गया तिरगुडी दी छड़दा है ए अपना सोचना नहीं बंद करदा अपनी मर्जी नहीं छोड़दा भाड़े की चलना बंदे बोलो मारी मत कोई मन मिलता मिल मावे मगन भया ते सच पावे ਮੱਤ ਕੋ ਮਨ ਮਿਲ ਕਾ ਬਿਲਮਾਵਾ ਜੇ ਮਾਨਤ ਕਰੇ ਮੰਨਜੀ ਵਿੱਚ ਨਾ ਪਾਣੇ ਚ ਚੱਲਣਾ ਪਾਣੇ ਨਾਲ ਮਿਲ ਕੇ ਚੱਲਣਾ ਜਾਂ ਤਾਂ ਪਾਣੇ ਦੇ ਵਿੱਚ ਮਿਲ ਕੇ ਚੱਲਣਾ ਜੇ ਮੰਨਜੀ ਵਿੱਚ ਕੋਈ ਐਸੀ ਗਲਤੀ ਨਾ ਕਰਿਓ ਵੀ ਚਲੋ ਹਾਲੇ ਦੇਖ ਲੈਣੇ ਥੋੜਾ ਚਿਰ ਕੋਈ ਕੰਮਕਾਰ ਹੈ ਕੋਈ ਨਿਆਣੇ ਛੋਟੇ ਨੇ ਕੋਈ ਗੱਲ ਹੈ ਇਹ ਗਲਤੀ ਨਾ ਕਰਿਓ ਕਹਿੰਨੇ ਮੱਤ ਕੋਈ ਮਨ ਮਿਲ ਕਾ ਬਿਲਮਾਵਾ ਕਰਨਾ ਇਹਦੇ ਵਿੱਚ ਵਿਲੰਭ ਲੰਭ ਕਰਮ ਵਿਲੰਭ ਪਾਤਮ ਗਲਤ ਕੰਮ ਕਰਦੇ ਵਿਲੰਭ ਚਾਹੇ ਕਰ ਲੋ ਇਹ ਚੰਗੇ ਕੰਮ ਦੀ ਵਿਲੰਭ ਨਹੀਂ ਕਰਨਾ ਹੈ ਬਿਲ ਮਾਵਾ ਹੈ ਮਗਨ ਪਿਆ ਤੇ ਨਾ ਉਹ ਸੱਚੀ ਤੀਖਾਪੂ ਹੋ ਜਾਂਦੀ ਹੈ ਇਹ ਮਗਨ ਹੋ ਜਾਂਦਾ ਆਪਣੇ ਰੂਪ ਨੂੰ ਜਾਣ ਕੇ ਫਿਰ ਵਿਲੰਭ ਦੀ ਇਹਨੂੰ ਅਲੱਗ ਦੀ ਗੱਲ ਰੱਖਣੀ ਫਿਰ ਇਹਨੂੰ ਗਲਿਆਈ ਰਹਿਣਾ ਚਾਹੀਦਾ ਠੀਕ ਹੈ ਜੀ ਏ ਭਗਤ ਕਬੀਰ ਜੀ ਦਾ 31ਵੀਂ ਪੌੜੀ ਦਾ ਸੀਗਾ ਜੀ ਉਪਦੇਸ਼ ਹਾਂ 32ਵੀਂ ਪੌੜੀ ਚ ਵੀ ਉਪਦੇਸ਼ ਆ ਜੀ ਭਗਤ ਕਬੀਰ ਜੀ ਦਾ ਮੰਮਾ ਮਨਸਿਓ ਕਾਜ ਹੈ ਮਨ ਸਾਦੇ ਸਿੱਧ ਹੋਏ ਮਨ ਹੀ ਮਨਸਿਓ ਕਹੇ ਕਬੀਰਾ ਮਨਸਾ ਮਿਲਿਆ ਨਾ ਕੋਈ ਸਭ ਤੋਂ ਮਨ ਨੂੰ ਮਾਰਨੀਆ ਗੱਲਾਂ ਕਰਦੇ ਨੇ ਸੱਦੋ ਲੋਕਾ ਉਹ ਪੁੱਛਿਓ ਮਨ ਨੂੰ ਮਾਰ ਕੇ ਮੁਕਤੀ ਜੀ ਨੂੰ ਨਾ ਹੋਵੇ ਧਾਰਾ ਕਮ ਦਾ ਮੰਦਿਰ ਵਾਲੇ ਆ ਉਹ ਮਾਰਨਾ ਦੀ ਹੈ ਮਨ ਨੂੰ ਸਾਧਣ ਦਾ ਮਤਲਬ ਮਨ ਮਾਰਨਾ ਜਿਵੇਂ ਸਾਧੀ ਦਾ ਸੁਖਿਆ ਮਾਰ ਲਿਆ ਮਨ ਦਾ ਸੁਭਾਅ ਜਿਹੜਾ ਹੈ ਉਹ ਬਦਲਣਾ ਸਾਧਣ ਉਹਦਾ ਸੁਭਾਅ ਬਦਲਣਾ ਵਾਇਆ ਦਾ ਬੋਝ ਛਡਾਉਣ ਦੇ ਤੇ ਮਨ ਸਰ ਦੇ ਸਿੱਧੀ ਹੋਏ ਮਨ ਜੇ ਕੋ ਮਨ ਮਰ ਗਿਆ ਵਾਇਆ ਨੂੰ ਛੱਡ ਲਾ ਸਮਝ ਸਿੱਧੀ ਪ੍ਰਾਪਤ ਹੋ ਗਈ ਕੋਈ ਸਾਰੀਓ ਸੋਚ ਲੋਕ ਦੀ ਸੋਚੀ ਪ੍ਰਾਪਤ ਹੋ ਗਈ ਸਿੱਧੀ ਸੋਚੀ ਹੁੰਦਾ ਬਣੀ ਮਨਸਾਂ ਕਹੇ ਕਬੀਰਾ ਕਬੀਰਾ ਆਪਣੇ ਮਨ ਨਾਲ ਜਲ ਕਰਦਾ ਗਿਆ ਤਾਂ ਬਣੀ ਬਸ ਉਹ ਇੱਕ ਮਨ ਦੂਏ ਮਨ ਨੂੰ ਕਹਿੰਦਾ ਕਾਇ ਕਬੀਰਾ ਮਨ ਸਾਹ ਮਿਲਿਆ ਨਾ ਕੋਈ ਬੰਦ ਵਰਗਾ ਤਾਂ ਕੋਈ ਮਿੱਤਰੇ ਨਹੀਂ ਮਿਲਿਆ ਮੈਨ ਕੋਈ ਦੁਸ਼ਮਣ ਇਹਦੇ ਵਰਗਾ ਤਾਂ ਮਿੱਤਰੇ ਕੋਈ ਨਹੀਂ ਸਾਰਾ ਲੈਣਾ ਗਲਤ ਪਾਸੇ ਜਾਣਾ ਰੋਕਣਾ ਹੈ ਜੀ ਬੰਦੀ ਸਪੀਡ ਜੇ ਗਲਤ ਪਾਸੇ ਨੂੰ ਚੱਲੇ ਜਾ ਉਹ ਜ਼ਿਆਦਾ ਸਪੀਡ ਨਾਲ ਪਾਸੇ ਨੂੰ ਵੀ ਜਾ ਸਕਦਾ ਇਹ ਭਗਤ ਕਬੀਰ ਜੀ ਦਾ ਸੀਗਾ ਤੇ ਹਾਸਾ ਮਹੱਲਾ ਪਹਿਲਾ ਪੱਟੀ ਚੋ ਮੰਮੇ ਮੋ ਮਰਣ ਮਦੂਸੂਦਨ ਮਰਣ ਭਇਆ ਤਬ ਚਿਤ ਵਯਾ ਮੰਮੇ ਮੋ ਮਰਣ ਮਦੂਸੂਦਨ ਮਦੂਸੂਦਨ ਦੇ ਮੋਹ ਦੇ ਵਿੱਚ ਮਰਨਾ ਜਿਹੜਾ ਹੈ ਉਹ ਤਾਂ ਮਰਨਾ ਹੈ ਸੱਚ ਦੇ ਨਾਲ ਪ੍ਰੇਮ ਪਾ ਕੇ ਮਰਨਾ ਪਹੇਗਾ ਮਰਨਾ ਅਸਲੀ ਹੋਜੀ ਮਰਣ ਭਇਆ ਤਬ ਚਿਤ ਵਯਾ ਜੇ ਮਰਦਾ ਵਜੇ ਯਾਦ ਹੈ ਉਹਦਾ ਮਨ ਨੂੰ ਜਾਗੜਾ ਹੈ ਉਹਦੇ ਮਨ ਵਿੱਚ ਜੇ ਸੌ ਜਾਂਦਾ ਤਾਂ ਦੇ ਵਿੱਚੋਂ ਸੌ ਪਾਸੇ ਜਾ ਕੇ ਆਉਂਦਾ। ਆਹ ਮਰਦ ਮਧੂ ਸੂਦਨ। ਇਹ ਕਿ ਮਧੂ ਸੂਦਨ ਕਿਉਂ ਕਿਹਾ ਜੀ? ਮਧੂ ਸੂਦਨ ਆਪਾਂ ਨੂੰ ਹੋਰਣੋ। ਇਹਦਾ ਕੀ ਭਾਵ ਬਣਦਾ ਮਧੂ ਤੇ ਸੂਦਨ ਦੋ ਸ਼ਬਦ ਹੈ ਜੀ। ਮਧੂ ਦਾ ਹੁੰਦਾ ਕਾਟੇ ਮਿੱਠਾ। ਸ੍ਰੇਸ਼ ਧਰ ਵਾਲਾ। ਸੂਦ ਤੁਹਾਨੂੰ। ਅੱਛਾ ਜੀ। ਨਾਬਦਲ ਵਾਲਾ ਮਠੋਲ ਵਾਲਾ ਬੰਦੂ ਠੀਕ ਹੈ ਜੀ ਕਾਇਆ ਭੀਤਰ ਅਵਰੋ ਪੜਿਆ ਮੰਮਾ ਅਖਰ ਵਿਸਤਰਿਆ ਜੇ ਕਾਇਆ ਦੇ ਅੰਦਰ ਕੁਝ ਹੋਰ ਪੜ ਲਿਆ ਨਾ ਬਦੇ ਹੋ ਗੋਂ ਤੋਂ ਬਿਨ ਤਾਂ ਫਿਰ ਤੋਂ ਮੰਮਾ ਅਖਰ ਵਿਸਰਿਆ ਉਹ ਅਖਾਰਾ ਬਾਦੂ ਵਿਸਰਿਆ ਹੋਇਆ ਜਿਹੜੇ ਕਾਇਆ ਦੇ ਥੋਂ ਕੁਝ ਹੋਰ ਪੜੀ ਫਿਰਦੇ ਨੇ ਬਾਹਲੇ ਸਰੀਰ ਨੂੰ ਕਾਇਆ ਮੰਨਦੇ ਨੇ ਮਦੂਸੂਤਨ ਅਸਲੀ ਨਹੀਂ ਉਹਨਾਂ ਵਾਸਤੇ ਮਦੂਸੂਤਨ ਲਖ ਲਈ ਹੈ ਉਹਨਾਂ ਨੇ ਮਦੂਸੂਤਨ ਸਰੀਰ ਮੰਨ ਲਿਆ ਉਹਨਾਂ ਵਾਸਤੇ ਮਾਇਆ ਰੂਪ ਉਹਨੂੰ ਠੀਕ ਹੈ ਜੀ ਕਾਇਆ ਭੀਤਰ ਅਵਰੋ ਪੜਿਆ ਮੰਮਾ ਅਖਰ ਵਿਸਤ੍ਰਿਆ ਉਹਨਾਂ ਬਾਦ ਦਾ ਖਰ ਮਾਇਆ ਖਲਦੀ ਹੈ ਨਾ ਪ੍ਰਾਣੀ ਹੁੰਦੀ ਹੈ ਠੀਕ ਹੈ ਜੀ ਨੂੰ ਅੱਖਰ ਨਹੀਂ ਪੜਨਾ ਔਂਕਣ ਨਾਲ ਅਖਰ ਪੜਾਂਗੇ ਕਿਉਂਕਿ ਅਖਰ ਹੈ ਆਪਣਾ ਮੂਲ ਹੈ ਜੀ ਜੀ ਹਾਂ ਠੀਕ ਹੈ ਜੀ ਹੁਣ ਉਪਦੇਸ਼ ਹੈਗਾ ਜੀ ਗੁਰੂ ਅਮਰਦਾਸ ਜੀ ਵੱਲੋਂ ਪੱਟੀ ਮਹੱਲਾ ਤੀਜਾ ਮੰਮੇ ਮਤ ਹਿਰ ਲਈ ਤੇਰੀ ਮੂੜੇ ਹਉਮੈ ਵੱਡਾ ਰੋਗ ਪਿਆ ਫੇ ਮੂੜੇ ਗਈ ਤੇਰੀ ਕਰਕੇ ਤੈਨੂੰ ਵੱਡਾ ਹਉਮੈ ਦਾ ਰੋਗ ਚਿੰਬੜ ਹੋ ਮੈਂ ਕਿ ਮੜਗੀ ਤੈਨੂੰ ਮੈਂ ਦਾ ਵੱਡਾ ਰੋਖ ਲਾ ਗਿਆ ਭੱਜ ਕੇ ਹਿੜੀ ਗਈ ਤੇਰੀ ਠੀਕ ਹੈ ਜੀ ਇੱਥੇ ਬੜੀ ਗੱਲ ਸਪਸ਼ਟ ਕੀਤੀ ਹੈ ਵੀ ਹਮੇ ਕਿੱਥੋਂ ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈ ਅੰਤਰ ਆਤਮਾ ਬ੍ਰਹਮ ਨਾ ਚੀਨਿਆ ਮਾਇਆ ਕਾ ਮੁਹਤਾਜ ਪਿਆ ਅੰਤਰ ਆਤਮਾ ਬ੍ਰਹਮ ਹੈਗਾ ਹੀ ਐ ਉਹ ਚੀਨਿਆ ਦੀ ਉਹ ਖੋਜਿਆ ਦੀ ਅੰਤਰਾ ਸਭ ਬ੍ਰਹਮਣ ਕੀ ਨਾ ਮਾਇਆ ਦਾ ਮੋਹਤਾਜ ਪਿਆ ਉਹ ਮਾਇਆ ਦਾ ਮੋਹਤਾਜ ਹੋ ਗਿਆ ਮਾਇਆ ਦਾ ਆਸਰਾ ਫੜ ਲਿਆ ਸਰੀਰ ਦਾ ਆਸਰੇ ਹੋ ਗਿਆ ਸਰੀਰ ਦੇ ਆਸਰੇ ਹੋ ਗਿਆ ਸਰੀ ਰੋਟੀਆਂ ਦੇ ਆਸਰੇ ਹੋ ਗਿਆ ਰੋਟੀਆਂ ਫਿਰ ਕਿਥੋਂ ਹਣ ਕੱਪਦੇ ਆਸਰੇ ਹੋ ਗਿਆ ਵਾਸ ਜਾਂਦਾ ਜਾਂਦਾ ਸਾਰ ਖੋਏ ਗਿਆ ਹੋਰ ਹੀ ਪੈ ਗਿਆ ਠੀਕ ਹੈ ਜੀ ਇਹ 7ਵੇਂ ਦਾ ਉਪਦੇਸ਼ ਸੀਗਾ ਜੀ ਗੁਰੂ ਅਮਰਦਾਸ ਜੀ ਦਾ ਹੋਣ ਹੈ ਜੀ ਗੌੜੀ 52 ਅਖਰੀ ਮਹੱਲਾ ਪੰਜਵਾਂ ਇਹਦੇ ਵਿੱਚ ਦੋ ਪੌੜੀਆਂ ਦਾ ਉਪਦੇਸ਼ ਹੈ ਜੀ ਦੋ ਪੌੜੀਆਂ 41 ਤੇ 42 ਮੰਮੇ ਅਖਰ ਵਾਸਤੇ ਹੀ ਆ ਜੀ ਅੱਛਾ ਜੀ ਸਭ ਤੋਂ ਪਹਿਲਾਂ 41 ਨੰਬਰ ਪੌੜੀ ਜੀ ਪੌੜੀ ਮੰਮਾ ਮੰਗਣ ਹਾਰ ਈ ਆਣਾ ਦੇਣ ਹਾਰ ਦੇ ਇਹਦੀ ਗੱਲ ਕਹੀ ਹੈ ਮੰਗਾ ਮੰਗਣ ਵਾਲੇ ਆਣਾ ਦੇਣ ਹਾਲ ਦੇ ਰਿਹਾ ਸਜਾਉ ਉਹ ਮੰਗਣ ਹਾਰ ਮੂਰਖ ਹੈ ਜੇ ਦੇਣ ਹਾਰ ਪਹਿਲੇ ਹੀ ਦੇ ਰਿਹਾ ਬਿਲੋਂ ਮੰਗੇ ਤੇ ਮੰਗਣ ਦੀ ਲੋੜ ਕੀ ਹੈ ਉਹ ਮੰਗਣ ਹਾਰੇ ਆਣਾ ਦੇਣ ਹਾਲ ਦੇ ਰਿਹਾ ਤੇ ਜਾਨਾ ਉਹ ਇਹ ਨਾ ਸਭ ਗੱਲ ਜਾਣਦਾ ਸਮਝ ਗਏ ਉਹ ਤਾਂ ਬਿਨਾ ਮੰਗੇ ਹੀ ਦੇ ਰਿਹਾ ਸਭ ਕੁਝ ਤੇ ਮੰਗਣ ਦੀ ਲੋੜ ਕੀ ਸੀ ਗੁੰਡਾ ਦਾ ਵਿਸ਼ਵਾਸ ਕੋ ਵਾਲਾ ਜਿਹਨੇ ਮੰਗ ਲਿਆ ਉਹਨੇ ਵਿਸ਼ਵਾਸ ਕੋ ਵਾਲਿਆ ਆਪਣੀ ਮੂਰਖਤਾ ਜाहिर ਕਰਨੀ ਪਰ ਉਸ ਦਾ ਨਹੀਂ ਹੈ ਉਰੂ ਕਿਸ ਗੱਲ ਤੇ ਕਿ ਇੱਕੋ ਵਾਰ ਸਭ ਲੈ ਕੇ ਆਪਿਆ ਤਰੂ ਦੇਣ ਦਾ ਫੈਸਲਾ ਜਿਹੜਾ ਉਹਦਾ ਬਨਮੁਰਖ ਮੂਰਖ ਕਰੇ ਪੁਕਾਰ ਇਹ ਮਨਮੁਰਖ ਤੈਨੂੰ ਘੜੀ ਘੜੀ ਰਿਹਾ ਸਾਰੀ ਪਦਾਰਥ ਤੇ ਤੈਨੂੰ ਜਿੰਨੇ ਕੋ ਹੱਜ ਕਰ ਸਕਦਾ ਜਿੰਨੇ ਤੈਨੂੰ ਲੋੜ ਹੈ ਜ਼ਹਿਰ ਫਲਕੋ ਦੀ ਬੰਗੀ ਦੀ ਫਲਕੋ ਦੀ ਖਾਈ ਦੀ ਇਹ ਜ਼ਹਿਰ ਗੋਣ ਗਾਲ ਦਿੰਦੀ ਹੈ ਜਿਹੜੇ ਗੋਣੇ ਨਾ ਇਹ ਜ਼ਹਿਰ ਗੋਣਾਂ ਨੂੰ ਕਾਲ ਦਿੰਦੀ ਆ ਤਾਂ ਹਿਸਾਬ ਦੀ ਦਿੰਦਾ। ਹੋਜੀ ਜੋ ਮੰਗੇ ਤੋ ਮੰਗੇ ਬੀਆ ਜਾ ਤੇ ਕੁਸਲ ਨਾ ਕਾਹੂ ਜੇ ਮੰਗੜਾਈ ਆ ਤਾਂ ਹੋਰ ਕੁਛ ਮੰਗ ਜੋ ਮੰਗੇ ਤੋ ਮੰਗੇ ਬੀਆ ਦੁੱਜੀ ਦੀ ਕਿਉਂ ਦੀ ਮਗਦਾਨ ਨਾਮ ਨਾਮ ਮੰਗਾ ਲਈ ਜਿਹੜੀ ਮੰਗਣ ਵਾਲੀ ਚੀਜ਼ ਹੈ ਜਿਹੜੀ بے غموں دے جاتے کوشن نہ کاو تیا جے تے سوکھ رہن والی کوئی چیز نہیں کواندو تیں رہن والی نہیں چیز اے میرے منگداں sukh shanti نے آنی اے تو مللی آیا تو تیرے ਮਾੰਗਨ ਮਾੰਗ ਤਾਂ ਇੱਕ ਹੈ ਮਾੰਗ ਨਾਨਕ ਜਤ ਪਰਹ ਪਰਾਗ ਕਹਿੰਦੇ ਜੇ ਮੰਗਣੀ ਹੈ ਮੂਰਖਾ ਇੱਕ ਚੀਜ਼ ਮੰਗ ਓ ਮੰਗੇ ਜਾਨਦਗੀ ਜਾਤੇ ਪਰਹ ਪਰਾਗ ਜੀਤੇ ਆ ਮਾਇਆ ਤੋਂ ਪਰੇ ਚੜਿਆ ਜਾਵੇਂ ਨਾ ਮੰਗੋ ਜੀਤੇ ਪਾਰ ਹੋ ਜਵੇ ਪਾਰੋ ਤਾਰਾ ਹੋ ਜਵੇ ਉਹ ਚੀਜ਼ ਮੁਗੀ ਜੇ ਬਗੜੀ ਕਰਕੇ ਨਾਨਕ ਮੰਗੇ ਨਾਮદાન ਕਿਰਪਾ ਕਰੋ ਹਰੇ ਨਾ ਨਾਮ ਨਾਲ ਮੰਗਦਾ ਨਾਮ ਕੇ ਕਾ ਯੋ ਦੀ ਜੋ ਮੰਦਰਾ ਉਹੀ ਕੋਲਾ ਜਿੰਨਾ ਹੈਗਾ ਕਹਿੰਦੇ ਹੋਰ ਦੇ ਦੇ ਨਾਮ ਵੀ ਉਹ ਮਰਜੀ ਦੇ ਦੇ ਠੀਕ ਹੈ ਜੀ ਇੱਥੇ ਪੌੜੀ ਦੇ ਉਪਦੇਸ਼ੀ ਸੰਪਤੀ ਹੈ ਜੀ ਹੁਣ 22ਵੀਂ ਪੌੜੀ ਚ ਵੀ ਮੰਮੇ ਅਖਰ ਦਾ ਉਪਦੇਸ਼ ਹੈਗਾ ਪੌੜੀ ਮੰਮਾ ਜਾਹੁ ਮਰਮ ਪਛਾਨਾ ਭੇਟਤ ਸਾਧ ਸੰਗ ਪਤੀਆਂ ਮੰਮਾ ਜਾਹੁ ਮਰਮ ਪਛਾਨਾ ਵੰਨਣਾੜਾ ਜਿਹਨੇ ਆਪਣਾ ਮਰਮ ਪਛਾਣ ਲਿਆ ਜਿਹਨੇ ਆਪਣਾ ਮੂਲ ਪਛਾਣ ਲਿਆ ਜਿਹਨੇ ਆਪਣਾ ਆਪਾ ਪਛਾਣ ਲਿਆ ਤੇੜ ਸਾਧ ਸੰਗ ਪਤਿਆਨਾ ਆਪਣਾ ਮੂਲ ਸਾਥ ਮਿਲ ਗਿਆ ਉਹਦੇ ਨਾਲ ਇੱਕ ਹੋ ਗਿਆ ਭੇਟ ਲਿਆ ਉਹ ਪਤਿਆਨਾ ਭਰੋਸਾ ਹੋ ਗਿਆ ਇੱਕ ਦਾ ਦਰਸ਼ਨ ਹੋ ਗਿਆ ਆਰਮਨ ਪਤੀ ਜੀ ਗਿਆ ਉਦੇ ਵਿਚਾਰ ਚ ਤਾਂ ਦੁੱਖ ਸੁੱਖ ਫਿਰ ਬਰਾਬਰ ਹੀ ਆ ਦੁਖਾਰ ਸੋਖਾ ਉਹਦੇ ਵਾਸਤੇ ਕੋਈ ਚੀਜ਼ ਨਹੀਂ ਕੋਈ ਨਹੀਂ ਨਰਕ ਸੁਰਗ ਰਹਤ ਹਉਦਾਰਾ ਇਹ ਦੁੱਖ ਸੁੱਖ ਵਾਲੇ ਤਾਂ ਨਾਰਕਰ ਸੁਰਗ ਦੇ ਵਿੱਚ ਉਹ ਸੁਰਗ ਦੇ ਵਿੱਚ ਹੈ ਸੰਸਾਰ ਕੇ ਸੁਖੀ ਰਹਿੰਦਾ ਜਿਹੜਾ ਨਰਕਾ ਉਹ ਵੀ ਰਹਦਾ ਰਹਿੰਦਾ ਫਿਰ ਉਹ ਨਰਕ ਇਹਦੇ ਵਿੱਚ ਸੰਸਾਰ ਕੇ ਰਹਿੰਦੇ ਨੇ ਦੇ ਰਸੋਗ ਸੰਸਾਰ ਸੰਸਾਰ 'ਚ ਰੱਖਣ ਜਾਣ ਦਿੰਦੇ ਹਾਂ ਜੀ ਅੱਛਾ ਸੰਸਾਰ ਦਾ ਜਨਮ ਵੀ অবতার ਕਿਹਾ ਨਾਮ ਨ ਕਬੂਲੀ ਨਾ ਇਹ ਕਹਿੰਦੇ ਹੋ ਕਿ ਰਾਮ ਦਾ অবতার ਹੋਇਆ ਤਾਂ ਰਾਮ ਤਾਂ ਸਾਰਿਆਂ ਦੇ ਅੰਦਰ ਹੀ ਹੈ ਫਿਰ ਹਾਂ ਜੀ ਉਹ ਆ ਅੰਦਰ ਆ ਰਾਮ ਦਾ ਉਤਾਰ ਕਹਿੰਉਂਦੇ ਨੇ ਐ ਰਾਮ ਦੀ ਅੰਸ਼ ਤੇ ਉਤਾਰ ਲਿਆ ਹੋਇਆ ਅੱਛਾ ਇਕ ਜੀ ਰਾਮ ਅਵਤਾਰ ਹੈ ਰਾਮ ਦਾ ਇਹ ਆਦਮੀ ਅਵਤਾਰ ਲੈਣ ਇਨਸਾਵਤਾਰ ਕਿਤੇ ਅਛਰੀ ਕੁਮਾਰ ਕਿਤੇ ਕਾਲ ਵਖਤ ਹੈ ਹਨ ਹੋ ਜੀ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸੇਖ ਜਿਹੜਾ ਆਪਣੇ ਮੂਲ ਦੇ ਨਾਲ ਜੁੜ ਗਿਆ ਉਹ ਹੀ ਨੇਪਾ ਉਹ ਜਿਹਦੇ ਨਾਲ ਜੁੜਿਆ ਉਹ ਲੈ ਲੈ ਪੈਣਾ ਤਾਉ ਸੰਗ ਤੀਰੇ ਸੰਗ ਤਾਉ ਲੈ ਲੈ ਪਾ ਜਿਹੜਾ ਲੈ ਲੈ ਉਹਦੇ ਨਾਲ ਜੁੜਿਆ ਹੁਣ ਬਾਇਆ ਤੇ ਅਨਿਕਤਾ ਹੋ ਗਿਆ ਹੋ ਪੂਰਨ ਘਟ ਘਟ ਪੁਰਖ ਵੀ ਸੇਖਾ ਦੇ ਵਿੱਚ ਜਿਹੜਾ ਪੂਰਨ ਪੁਰਖ ਹੈ ਵਿਸ਼ੇਸ਼ ਪੂਰਨ ਪੁਰਖ ਉਹ ਹੈ ਉਹ ਜਿਹੜਾ ਆਪਣੇ ਮੂਲ ਨਾਲ ਜੁੜ ਗਿਆ ਵੀਰ ਦੇ ਹੁੰਦੇ ਹੋਏ ਕਟ ਘੱਟ ਦੇ ਵਿੱਚ ਪੂਰਨ ਪੁਰਖ ਹੋ ਗਿਆ ਫਿਰ ਉਹ ਪੂਰਨ ਪੁਰਖ ਆਪੇ ਹੀ ਕਹੇ ਉਹ ਗੁਰਮੁਖ ਹੈ ਆਪ ਉਹ ਮਾਇਆ ਵਿੱਚ ਉਦਾਸੀ ਹੈ ਠੀਕ ਹੈ ਇੱਥੇ ਘੱਟ ਤੇ ਵਾਓ ਤੇ ਚਲੋ ਇਹ ਮੁਕਤੇ ਟਾਪ ਨਾਲ ਪਰੂਠੀ ਕਰਨੇ ਪੈਣੇ ਨੇ ਉਹਨੂੰ ਕਿਹੜਾ ਅਸਾਂ ਦਾ ਪਤਾ ਸੀ ਤੇ ਸਿਆਰੀ ਹੋਣੀ ਨਹੀਂ ਉਹਦੇ ਕੋਲ ਮੁੱਕੀ ਹੋਈ ਹੋਊ ਪੂਰਣ ਘਟਾ ਇੱਕ ਆਪ ਹੈ ਦੇ ਵਿੱਚ ਆ ਬਾਹਰਲਾ ਬਾਹਰਲੇ ਸ਼ਰੀਰ ਦੇ ਅੰਦਰ ਜਿਹੜਾ ਸ਼ਰੀਰ ਦੂ ਹੈ ਘਟ ਹੈ ਬਾਹਰਲੇ ਘਟ ਦੇ ਵਿੱਚ ਜਿਹੜਾ ਅੰਦਰ ਘਟ ਹੈ ਉਹਦੇ ਵਿੱਚ ਵਿਸ਼ੇਸ਼ਪੁਰਖ ਉਹ ਪੂਰਣਿਕ ਪੂਰਨ ਕਰਨ ਦੀ ਕਪੈਸਿਟੀ ਰੱਖਦਾ ਜਿੱਥੇ ਤੱਕਦਾ ਉਹਨੂੰ ਗਿਆਨ ਪਹਿਲਾਂ ਹੁੰਦਾ ਸੰਗ ਤਾਂ ਹੂੰ ਨਿਰਲੇਪਾ ਕਰ ਲਿਆ ਜਾਵੇ ਤਾਂ ਪੂਰਨ ਹੋ ਜਾਂਦਾ ਹੈ ਜੀ ਹਾਂ ਇਹ ਇਕੱਠੇ ਚੱਲਣ ਤਾਂ ਹੂੰ ਸੰਗ ਤਾਂ ਹੂੰ ਨਿਰਲੇਪਾ ਪੂਰਨ ਘਟ ਘਟਪੁਰਖ ਵਿਸ਼ੇਖ ਹਾਂ ਤਾਂ ਹੂੰ ਸੰਗ ਉਹਦੇ ਨਾਲ ਤਾਂ ਨਿਰਲੇਪਾ ਜਿਹੜਾ ਨਿਰਲੇਪਾ ਅੱਛਾ ਜੀ ਜੇ ਸੰਗਤ ਕਾਲ ਲੈਂਦਾ ਉਹ ਵੀ ਲੀਵ ਹੋ ਜਾਂਦਾ ਠਟਕੜ ਪੂਰਖ ਵਿਸੇਖ ਇਹ ਹੋ ਜਾਂਦਾ ਸੰਗਤ ਕਰਕੇ ਫਿਰ ਇਹ ਪੂਰਨ ਠਟਕੜ ਪੂਰਖ ਵਿਸੇਖ ਹੈ ਜੀ ਸੰਗ ਹੋ ਗਿਆ ਨਾ ਫਿਰ ਪੂਰਨ ਹੋ ਗਿਆ ਨਾ ਅੱਗੇ ਜਾ ਕੇ ਸੰਗ ਤੇ ਬਾਦ ਪੂਰਨ ਹਾਂਜੀ ਹੋਜੀ ਉਹ ਰਸ ਮੈਂ ਵਾਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤਹਿ ਮਾਇਆ ਉਹ ਰਸ ਮੈਂ ਵਾਹੂ ਸੁਖ ਪਾਇਆ ਉਹ ਜਿਹੜਾ ਰਸ ਹੈ ਬਿਲਾਪ ਦਾ ਉਹਦੇ ਵਿੱਚ ਕੋਹ ਸੁਖ ਪਾਇਆ ਵਾਹ ਸੁਖ ਪਾਇਆ ਉਹੀ ਸੁਖ ਆਪ ਤੋਂ ਨਾ ਨਾਨਕ ਲਿਪਤ ਨਹੀਂ ਤੇ ਮਾਇਆ ਨਾਨਕਨ ਉਹ ਤੇ ਮਾਇਆ ਦੀ ਲਿਪਤਾ ਜੀ ਮਾਇਆ ਵਾਲਾ ਪੈਸੋ ਖਾ ਡੋਖਲੀ ਹੁੰਦਾ ਨਾ ਮਾਇਆ ਦਾ ਕੋਈ ਰਾਸ ਨਹੀਂ ਨਾ ਕੋਈ ਮਾਇਆ ਦਾ ਸੁਖ ਹੁੰਦਾ ਨਾ ਕੋਈ ਮਾਇਆ ਦਾ ਸੁਖ ਹੁੰਦਾ ਹੋਜੀ ਠੀਕ ਹੈ ਜੀ ਮੰਮੀ ਅਖਰ ਤੋਂ ਕਾਫੀ ਉਪਦੇਸ਼ ਦੋ ਵਾਰ ਭਗਤ ਕਬੀਰ ਜੀ ਨੇ ਕੀਤਾ ਜੀ ਦੋ ਵਾਰ ਪੰਜਵੇਂ ਪਾਤਸ਼ਾਹ ਨੇ ਕੀਤਾ ਤੇ ਗੁਣਾਂਖਤਾਬ ਦੀ ਵੀ ਇੱਕ ਪੌੜੀ ਸੀ ਤੇ ਇੱਕ ਪੌੜੀ ਤੀਸਰੇ ਮੰਜ਼ਲੇ ਦਿੱਤੀ ਗੱਲ ਇਹ ਹੈ ਕਿ ਮੰਮਾ ਜਿਹੜਾ ਅਖਰ ਹੈ ਮੰਮੇ ਤੋਂ ਅਖਰ ਦਾ ਉਪਦੇਸ਼ ਹੈ ਉਹ ਅਖਰ ਨਾਲ ਆਪਾਂ ਇੱਕ ਹੋਣਾ ਠੀਕ ਹੈ ਤੇ ਜਿਹੜਿਆਂ ਨੇ ਅੰਤਰਾਤਮਾ ਬ੍ਰਹਮਣਾ ਚੀਨਿਆ ਮਾਇਆ ਕਾ ਮੁਹਤਾਜ ਪਿਆ ਉਹਨਾਂ ਨੂੰ ਦੁਬਾਰਾ ਦੁਬਾਰਾ ਮਾਇਆ ਦੇ ਵਿੱਚ ਆ ਕੇ ਦਰਮ ਲੈਣਾ ਪਏਗਾ ਹਾਂਜੀ ਅੱਜ ਤੇ ਮੰਮੀ ਅਖਰ ਦੇ ਉਪਦੇਸ਼ ਦੀ ਸਮਾਪਤੀ ਹੈ ਜੀ